थर थर कंपै जीड़ा स्थान बिहुणा जगह टगळू दैवल देन्ना जल थर थर कददा है ਕੀ ਗੱਲ ਤੇ ਕੋਈ ਜਲਾ ਹੋਵੇ ਤੇ ਗੜੂ ਠੀਕੇ ਗਏ ਹਾਂ ਹਾਂ ਜੇਕਰ ਬਾਇਆ ਚੱਕ ਅਬਦਲ ਇਹ ਰਹਿੰਦਾ ਹੈ ਹਾਂ ਹਾਂ ਹਾਂ ਠੀਕ ਹੈ ਤੋਂ ਪੱਕੀ ਕੰਮ ਪੈ ਹੋਣਾ ਹੋਏ ਹਾਂ ਮਾਨ ਸੱਚ ਏ ਕਹੇ ਕਾਜ ਨਾ ਫਿੱਟੇ ਕੋਈ ਥਾਨ ਮਾਨ ਤੱਕ ਏ ਤਾਂ ਬੋਲਦਾ ਸੱਚ ਸੱਚੇ ਧਾਨੇ ਸੱਚੇ ਬੋਲ ਆਜਾ ਨਾ ਥਾਨ ਮਾਨ ਸੱਚ ਏਕ ਹੈ ਕਾਜ ਨਾ ਫਿੱਟਾ ਕੋਈ ਕਾਹ ਕੋਈ ਕੰਪਨੀ ਫਿੱਟਦਾ ਕੋਈ ਕੰਗੁਦਲੀ ਰੁਕਦਾ ਫਿਰ ਤੇ ਸਾਰੇ ਕੋਈ ਟੋੜਿਆ ਰਹੇ ਹਾਂਜੀ ਸੱਚੇ ਬੋਲੇ ਸਾਡੇ ਕੋਈ ਸਰਬੋਤਮ ਬੋਲੇ ਕੋਈ ਕਾਹੀ ਬੜੀ ਸਰਬੋਤਮ ਬਿੜਲਾ ਠੀਕ ਹੈ ਕਾਜ ਨਾ ਟਿਕਿਆ ਕੋਈ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰਨਗ ਨਾਥੈ 나ਚ ਤੂੰ ਨਿਤਾਰਾ ਆਤਾਰ ਹੇ ਥਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ ਨਾਰਾਇਣ ਥਿਰ ਹੈ ਗੁਰੂ ਥਿਰ ਹੈ ਸੱਚਾ ਵਿਚਾਰ ਥੇਰਾ। ਹੂੰ। ਇਹ ਲਈ ਚੀਜ਼ਾਂ ਥਰਦੂ। ਅੱਛਾ ਜੀ। ਜਿੱਦੇ ਸੱਚਾ ਵਿਚਾਰ ਹੈ ਉਹ ਵੀ ਥੇਰਾ, ਉਹ ਗੁਰੂ ਵੀ ਥੇਰਾ, ਸੱਚ ਨਾਲ ਜੁੜਿਆ ਹੋਇਆ। ਹੂੰ। ਸੱਚ ਦਾ ਵਿਚਾਰ ਕਰਨ ਵਾਲਾ ਸੇਵਾ ਕਰਨੀ ਗੁਰੂ ਥੇਰਾ। ਅੱਛਾ ਜੀ। ਤੂੰ। ਹੂੰ। ਦੇਵਤੇ ਦੇ ਰਾਤੇ ਦੇ। ਕੀ ਤਾਰਾ ਆਤਾ ਇਹਨਾਂ ਦਾ ਹਰ ਕੋਈ ਨਹੀਂ ਉਹਨਾਂ ਦਾ ਵੀ ਆਧਾਰ ਹੈ ਠੀਕ ਹੈ ਜੀ ਇਹ ਨਾਰਾਇਣ ਤੇ ਫਰਕ ਗੁਰੂ ਨਾਰਾਇਣ ਆਪਣਾ ਮੂਲ ਹੈ ਜੀ ਨਾਰਾਇਣ ਦਾ ਗੁਰੂ ਕੋਈ ਕਹ ਲੈ ਨਾ ਨਾਰਾਇਣ ਨੂੰ ਕਹਿੰਦੇ ਨੇ ਜਿੱਥੇ ਧੇਰਾ ਹੈ ਦੀ আচ্ছা ਜੀ ਗੁਰੂ ਦਾ ਅਰਥ ਹੈ ਦਾ ਵਾਰਾਇਣ ਦਾ ਮਤਲਬ ਹੈ ਜੇ ਤਨ ਵਾਰਾਇਣ ਉੱਤੇ ਰਾਤ ਹੁੰਦੀ ਓਦੀ ਕੋਈ ਨਾ ਇੱਕੋ ਹੀ ਅੱਛਾ ਜੀ ਠੀਕ ਹੈ ਜੀ ਸਰਬੇ ਥਾਨ ਤਰੰਤਰੀ ਤੂੰ ਦਾਤਾ ਜੈ ਦੇਖਾਂ ਤੇ ਇੱਕ ਤੂੰ ਅੰਤ ਨਾ ਬਾਰ ਬਾਰ ਥਾਨ ਤਰੰਤਰੀ ਤੂੰ ਦਾਤਾ ਦਾ ਆ ਜਗਾ ਤੂੰ ਹੈਗਾ ਠੀਕ ਹੈ ਜੀ ਹਾਜੇਗਾ ਹਾਜੇਗਾ ਦਰੂ ਲੱਬ ਲਿਆ ਹੋਇਆ ਹੈ। ਕੋਲ ਬਿਆ ਸੁਲੱਬੇ। ਅੱਛਾ ਜੀ। ਅਰਤੂ ਤੇ ਲੱਭ ਜਾਂਦਾ ਹੈ। ਅਰਤੂ ਤੇ ਲੱਭਦਾ ਹੈ ਉਹ। ਕੋਰੇ ਤੇ ਹਰ ਜਗ੍ਹਾ ਮੌਜੂਦ। ਕੋਰੇ ਤੇ ਤਾਂ ਤੂੰ ਦਾਤਾ ਦਾਤਾ ਤੂੰ ਦਾਤਾ ਦਾਤਾ ਤੂੰ ਦਾਤਾ ਦਾਤਾ ਅਜਿਹਾ ਹੈ ਗਏ ਜੇ ਦੇਖਾਂ ਤਾਂ ਇੱਕ ਤੋਂ ਅੰਤਾਂ ਪਾਰ ਆਸ ਯਾਹ ਦੇਖਾਂ ਤਾਂ ਇੱਕ ਤੋਂ ਅੰਤਾਂ ਪਾਰ ਜਿੱਥੇ ਮੈਂ ਦੇਖ ਤੂੰ ਅੰਤ ਪਾਰ ਕੋਈ ਠੀਕ ਹੈ ਜੀ ਤਾਂਤਨੰਤ ਰਵ ਰਹਾ ਗੁਰ ਸ਼ਬਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਗਮ ਆਪਾਸ। ਵਿਚਾਰ। ਗੁਰ ਸ਼ਬਦੀ ਵਿਚਾਰ ਤੋਂ ਪਤਾ ਲੱਗਿਆ ਹਰ ਜਿੰਦਾਂ ਰਬਿਆ ਸਤੂ ਹੈਗਾ। ਅੱਛਾ। ਗੁਰ ਦਾਨ ਦੇਵਸੀ ਵੱਡਾ ਵੱਡਾ ਗਮ ਆਉਂਦਾ ਪਾਸ। ਬਿਨਾਂ ਤਾਂ। ਵੱਡਾ ਅਗਾਮਾ ਪਾਰ ਹੈ ਗਾਮਾ ਪਾਰ ਵੱਡਾ ਹੈ ਦੇਖੋ ਛੋਟਾ ਨਹੀਂ ਹੈ ਵੱਡਾ ਹੈ ਫਿਰ ਵੀ ਇਹ ਗਾਮਾ ਪਾਰ ਹੈ ਇਹ ਵੀ ਬਲਕੀ ਬੁੱਧੀ ਤੋਂ ਪਰੇ ਹੈ ਕੀ ਹੈ